ਆਉੜੀ ਜਿੱਤ ਸੇਵੀ ਹੈ ਸੁਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀ ਹੈ ਸੰਭਾਲੀ ਹੁੰਦਾ ਸੰਭਾਲੀ ਬੱਬਾ ਨਹੀਂ ਰਹੇ ਵਿੱਚ ਗਲਤ ਬੋਲਦੇ ਨੂੰ ਵਿਚ ਜੀ ਉਹਦੇ ਨੂੰ ਕਹਾ ਬੋਲਦੇ ਰਿਹਾ ਸੰਭਾਲੀਏ ਸਮਝ ਆਣਾ ਸੰਭਾਲੀ ਹੁੰਦਾ ਸੰਭਾਲਣਾ ਅਸ ਵੀ ਹੋਣਾ ਸੰਭਾਲਣਾ ਪਤਾ ਨਹੀਂ ਕਿਉਂ ਸੰਭਾਲੀ ਕਹੀ ਜਾਂਦੇ ਰਹੋ ਉਹ ਨੂੰ ਸਮਝ ਨਹੀਂ ਗਈ ਸਮਾਉਣ ਨੂੰ ਸੰਭਾਲੀਏ ਕਹਿੰਦਾ ਹੁੰਦਾ ਸਮਾਜ ਆਣੋ ਵਿੱਚ ਹਾਂਜੀ ਜਿੱਤ ਸੇਵੀਆ ਸੁਖ ਪਾਈਏ ਜੇ ਦੀ ਸੇਵਾ ਕਰਦੂ ਨਾਲੇ ਹੀ ਸੁਖ ਮਿਲ ਜਵੇ ਉਹ ਜਿਹੜਾ ਸਾਹਿਬ ਹੈ ਉਹਦੇ ਚ ਸਦਾ ਹੀ ਸਮਾਏ ਰਹਿਣਾ ਚਾਹੀਦਾ ਸਦਾ ਹੀ ਜੁੜੇ ਰਹਿਣਾ ਚਾਹੀਦਾ ਇੱਕ ਬਿਕ ਹੋ ਕੇ ਰਹਿਣਾ ਚਾਹੀਦਾ ਉਹਨੂੰ ਉਹ ਸਾਹਿਬ ਉਹ ਉਹ ਆਪਣਾ ਰੂਪ ਹੈ ਉਹ ਆਪਣਾ ਰੂਪ ਹੈ ਉਹ ਸਤਗੁਰ ਹੈ ਸਤਗੁਰ ਕੀ ਸੇਵਾ ਸਫਲਾ ਜਿਗ को करे ਜਿਤਲਾ ਹੈ ਉਹ ਅੰਦਰ ਹੈ ਤੇਰੇ ਜਿਹੜਾ ਰਾਮ ਅੰਦਰ ਫਵਾ ਘਟ ਰਾਮ ਬੋਲੇ ਉਹਦੀ ਸੇਵਾ ਸਫਲ ਹੈ ਹਾਂਜੀ ਜਿਤ ਇਤਾ ਪਾਈਏ ਆਪਣਾ ਸਾਹ ਹਾਲ ਬੁਰੀ ਕਿਉ ਘਾਲੀ ਹੈ ਉਹ ਤਾਂ ਇਹ ਨਹੀਂ ਪੁੱਛਿਆ ਵੀ ਉਹਦੀ ਸੇਵਾ ਕਿਵੇਂ ਹੋਊਗੀ ਉਹਦੀ ਸੇਵਾ ਉਹਦਾ ਜੋ ਕਹਿਣਾ ਹੈ ਉਹ ਅੰਤਰ ਆਤਮੁਲ ਦੀ ਉਸ ਵਾਅਦੇ ਅਨਸਾਰ ਚੱਲਣਾ ਹੀ ਉਹਦੀ ਸੇਵਾ ਹੈ ਗੁਰ ਕੀ ਗੁਰ ਕੀ ਸੇਵਾ ਸ਼ਬਦ ਵਿਚਾਰ ਗੁਰ ਸੇਵਾ ਗੁਰ ਸ਼ਬਦ ਵਿਚਾਰ ਉਹਦੇ ਵਿਚਾਰ ਚੱਲਣਾ ਹਾਂਜੀ ਜਿਤ ਕੀਤਾ ਪਾਈਏ ਅਪਨ ਜਿਹੜੀ ਜਿਹੜਾ ਕੰਮ ਕਰਨ ਨਾਲ ਆਪਣਾ ਕੀਤਾ ਪਾਈਦਾ ਹਾਂਜੀ ਨੁਕਸਾਨ ਉੱਗਦਾ ਆਪਣਾ ਕੀਤਾ ਪਾਵੇਂਗਾ ਆਪ ਬੈਲੈਂਸ ਵਿੱਚ ਕਹਿੰਦੇ ਜਿਹੜਾ ਗੁਰਦਸਹਿਬ ਦਾ ਆਪਣਾ ਕੀਤਾ ਜੀ ਹੈ ਗੁਰ ਕੀ ਸੇਵਾ ਹੈ ਜਪੜਨ ਕੀਤਾ ਜੀ ਬਾੜੇ ਚੱਲਣ ਦੇਖੋ ਫਰਕ ਹੋ ਗਿਆ ਨਾ ਕੀਤਾ ਆਪਣੀਆਂ ਉਹ ਉਹ ਵੀ ਹੈ ਪੁਰਬਾਪ ਉਹ ਆਪਣੇ ਬਾੜੇ ਚੱਲਦਾ ਇਹ ਬੰਦਦਾ ਉਹ ਵੀ ਪੁਰਬਾਪ ਪੁਰਬਾਪ ਉਹ ਤੋਂ ਬਣੀ ਹੁੰਦਾ ਜੇ ਬੰਦਦਾ ਉਹ ਤੋਂ ਪੁਰਬਾਪ ਜਦ ਜਾਣੇ ਮੈਂ ਕੁਝ ਕਰਦਾ ਜਿਹੜੇ ਲੋਕ ਆਪਣੇ ਬਾੜੇ ਚੱਲਦੇ ਨੇ ਉਹ ਕਦੇ ਨਹੀਂ ਬੰਦਦੇ ਪੁਰਬਾਪ ਨਹੀਂ ਹੁੰਦਾ ਜੀ ਉਹ ਬਰਦਲੇ ਬੁਰਬਾਹੁੱਦਾ ਬਦਲ ਗਈ ਉਹ ਜਿਹੜੇ ਹੁਕਮ ਚੱਲਦੇ ਨੇ ਲੋਕਾਂ ਦੇ ਬੁਰਬਾਹੁੱਦਾ ਦੀ ਉਹਨਾਂ ਨੂੰ ਹੁਦਾ ਨਹੀਂ ਕਿ ਉਹ ਗਿਆਨवान ਦੇ ਗਿਆਨ ਪਿਆਦਾ ਕਰ ਕਰਮੇਨਾਸ਼ ਜਿਤ ਕੀਤਾ ਆਪਣਾ ਕੀਤਾ ਪਾਉਂਗੇ ਕਹਿੰਦੇ ਜੀ ਤੁਸੀਂ ਕਹਿੰਦੇ ਆਪਣਾ ਕੀਤਾ ਪਾਉਣ ਫਿਰ ਉਹ ਐਸਾ ਕੰਮ ਕਰੀਏ ਕਿਉਂ ਛੱਡੇ ਲਈਏ ਜਿਤ ਕੀਤਾ ਪਾਈਏ ਆਪਣਾ ਸਹ ਬੁਰੀ ਉਹ ਤਾਂ ਫਿਰ ਬੁਰੀ ਹਾਲ ਹੈ ਕਿਉਂ ਕਹਾਲਦੇ ਉਹਨੂੰ ਨਾਲੇ ਕਹੀ ਜਾਂਦੇ ਆਪਣਾ ਨੀਤਾ ਪਾਉਂਗੇ ਨਾਲੇ ਹਟਦੇ ਦੀ ਆਪਣਾ ਕਰਦੇ ਐ ਕਹਿ ਰਹੇ ਨੇ ਜੀ ਇਹਦਾ ਮਤਲਬ ਹੈ ਉਹਨਾਂ ਸਵਾਲ ਆ ਉਹਨਾਂ ਦੀ ਉਹਨਾਂ ਦੀ ਗੱਲ ਦਾ ਹੀ ਸਵਾਲ ਸਵਾਲ ਕਰਿਆ ਉਹਨਾਂ ਦੀ ਜਿਹੜੀ ਬਰੋਤ ਹੈ ਉਹਦੇ ਤੇ ਸਵਾਲ ਹੈ ਜੀ ਜੀ ਜੇ ਇਹਨੂੰ ਗੁਰਬਾਨੀ ਵੱਲੋਂ ਫਿਰ ਉਲਟਾ ਹੋ ਫਿਰ ਕੰਟਰੋਵਰਸੀ ਲੱਗੂ ਤੁਹਾਨੂੰ ਵੀ ਗੁਰਬਾਨੀ ਕਰੀ ਨਹੀਂ ਗੱਲ ਕਰਦੀ ਹੈ ਤੇ ਰਾਹ ਨੂੰ ਤੁਤੂ ਇਦਾਂ ਨਹੀਂ ਹੈ ਉਹ ਨਾਲ ਤੇ ਸਵਾਲ ਕੀਤਾ ਤੇ ਆ ਤੁਸੀਂ ਬੋਲਦੇ ਹੋ ਫਿਰ ਆ ਕਰਦੇ ਹੋ ਜੀ ਬੜੀ ਅ ਬਾਬਾ ਜੀ ਇੱਕ ਸਵਾਲ ਜਿਹੜਾ ਉੱਪਰ ਸੇਵੀਏ ਨੂੰ ਥੋੜਾ ਹੋਰ ਕਲੀਅਰ ਕਰੋ ਫਿਰ ਹੁਣ ਅ ਪਹਿਲਾਂ ਵੀ ਪਿੱਛੇ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਸਾਰਾ ਦਿਨ ਜਿਵੇਂ ਹੁਣ ਪਹਿਲਾਂ ਤੱਕ ਐਨੇ ਜੀ ਨਿਤਨੇਮ ਕਰਦੇ ਹਾਂ ਸਵੇਰੇ ਕੁਝ ਕਰਦੇ ਹਾਂ ਉਹ ਵੀ ਆਪਾਂ ਨੇ ਕਿਹਾ ਵੀ ਬਾਣੀ ਸਾਰੀ ਪੜ੍ਹਨੀ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਕਹਿੰਦੇ ਵੇਲੇ ਪੈਮ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਪਰ ਜਿੱਦ ਸੇਵਾ ਤੁਸੀਂ ਹੁਣ ਕਿਹਾ ਜੀ ਅੰਤਰਾਤਮਾ ਦੀ ਗੱਲ ਮੰਨਣੀ ਹੀ ਸੇਵਾ ਹੈ ਹਾਂ ਵਧੀਆ ਚੱਲ ਰਹੀ ਹੈ ਸੇਵਾ ਦੇਖੋ ਅੰਤਰਾਤਮਾ ਕਿਉਂ ਸਾਡੂੰ ਬੁਰੇ ਕੰਮ ਤੇ ਰੋਕਦੀ ਹੈ ਅਸਲ ਤਾਂ ਤਾਂ ਅੰਤਰਾਤਮਾ ਦੀ ਉਹ ਮੁਕਤੀ ਹੈ ਅੰਤਰਾਤਮਾ ਦਾ ਹੀ ਕੰਮ ਹੈ ਕਿ ਕੋਈ ਦੋ ਦੋ ਦੀ ਹਵੇ ਸਮਝ ਆ ਜੀ ਜਿਹੜਾ ਕੰਮ ਕਰਨਾ ਆ ਉਹ ਅੰਤਰਾਤਮਾ ਕਰਾ ਰਹੀ ਹੈ ਜਿਹੜਾ ਨਹੀਂ ਕਰਨਾ ਉਹ ਅਸੀਂ ਆਪਣੀ ਮਰਜ਼ੀ ਕਰ ਰਹੇ ਆ ਦੇਖ ਕੇ ਅੱਖਾਂ ਤੋਂ ਪ੍ਰਭਾਵਤ ਹੋ ਕੇ ਕਰਨਾ ਤੋਂ ਤੋਂ ਪ੍ਰਭਾਵਤ ਜਿਵੇਂ ਲੋਕ ਕਰ ਰਹੇ ਨੇ ਉਹਨਾਂ ਤੋਂ ਪ੍ਰਭਾਵਤ ਹੋ ਕੇ ਕਰ ਰਹੇ ਬਾਹਰ ਬਿਰਬੁੱਖਾ ਤੋਂ ਪ੍ਰਭਾਵਤ ਹੋ ਕੇ ਕਰ ਰਹੇ ਬਿਰਬਤਾ ਤੋਂ ਪ੍ਰਭਾਵਤ ਹੋ ਕੇ ਕਰ ਰਹੇ ਇਹ ਜਿਹੜੀ ਗੁਰਬਾਣੀ ਸਾਨੂੰ ਕਹਿ ਰਹੀ ਹੈ ਇਹ ਦਰਗਾਹ ਤੋਂ ਆਈ ਹੈ ਸਾਨੂੰ ਬਸ ਸੇ ਆਇਆ ਹੈ ਇਹ ਸਿੱਖਿਆ ਆਈ ਹੈ ਵੀ ਆਹ ਕੰਮ ਕਰੋ ਹਾਲ ਕਰੋ ਜਿਹੜਾ ਕਰ ਜੇ ਅਸੀਂ ਗੁਰਬਾਣੀ ਦੇ ਅਸਾਰ ਜੀਵਤ ਜਿਉਰ ਦਾ ਹੋਵੇ ਬਾਹਰੋਂ ਦਾ ਹੀ ਹੋਰ ਬਾਹਰੋਂ ਦਾ ਕੁਛ ਫਸੀ ਹੋਈ ਹੈ ਤੁੱਪ ਨੂੰ ਕੋਣ ਬਤਾ ਲੂਗਾ ਸੂਰਜ ਨਾਲ ਤਪਣਾ ਲੇ ਚਲੀ ਜਾਂਦੀ ਹੈ ਤੂੰ ਰੋਕ ਕੇ ਦਿਖਾਓ ਤੁਸੀਂ ਸੂਰਜ ਰੋਕਿਆ ਜਾ ਸਕਦਾ ਆਹ ਵਿੱਚ ਸੂਰਜ ਹੈ ਭਾਏ ਵਿੱਚ ਧੁਪੜੀ ਹੈ। ਭਾਏ ਵਿੱਚ ਚੱਲਦਾ ਹੈ ਤਾਂ ਭਾਏ ਵਿੱਚ ਚੰਦ ਨਹੀਂ ਨਹੀਂ ਹੈ। ਚੰਦ ਨਹੀਂ ਤਾਂ ਜੇ ਚੰਦ ਨਹੀਂ ਵਖਰੀ ਹੋਵੇ ਤਾਂ ਭਾਏ ਦੇ ਵਿੱਚ ਗੁਰੂ ਵੀ ਗਿਆ ਜਾਵੇ। ਜੇ ਚੰਦ ਨਹੀਂ ਹੋਵੇ ਤਾਂ ਉਹਨੂੰ ਵੀ ਭਾਏ ਵਿੱਚ ਕਿਹਾ ਜਾਵੇ। ਵਖਰੀ ਹੈ ਹੀ ਨਹੀਂ ਉਹ। ਇਸ ਕਰਕੇ ਜੀਵ ਆਤਮਾ ਵਿੱਚ ਖਰਾਬ ਕੁਝ ਨਹੀਂ ਇਹ ਉਹਦਾ ਪ੍ਰਤਾਪ ਹੈ ਦਾ। ਅਕਲਾਂ ਹੀ ਫਸਿਆ ਹੋਇਆ। ਆਦੇ ਵਿੱਚ ਆਇਆ ਉਹ ਵਿੱਚ ਗਿਆ। ਉਦੀ ਹੋ ਦੂਰ ਹੋ ਗਈ ਤਾਂ ਉਹਦੇ ਵਿਚੋਂ ਜਿਹੜੀ ਹੈਗੀ ਐ ਉਹ ਦੂਰ ਕਰੂਗੀ ਗੁਰਬਾਣੀ ਜੇ ਉਹ ਜੇ ਗੁਰਬਾਣੀ ਨਾ ਮਿਲੇ ਨਾ ਉਹਨੂੰ ਉੱਦਲੇ ਨੂੰ ਉੱਧਰ ਤਾਂ ਉਹ ਜਿਹੜਾ ਧਰ ਬਣਾਉਗਾ ਉਹ ਚੋਂ ਉਹਦੀ ਜਾਣੀ ਹੈ ਗੁਰਬਤਾ ਚ ਹੋਦੀ ਗਈ ਗੁਰਬਤਾ ਅਤਰਾਤਮਾ ਨਹੀਂ ਬਣੀ ਹੋਈ ਹਿੱਸੇ ਭਾਵੇਂ ਬਹੁਤ ਚੱਗੇ ਬੱਤਾ ਦੇ ਵਿੱਚ ਬਹੁਤ ਚੰਗੀਆਂ ਗੱਲਾਂ ਨੇ ਆਤਮ ਵਧੀਆ ਆਦਮੀ ਘੜਤ ਘੜਤ ਘੜਦੀ ਆ ਜੀ ਸਾਰੇ ਧਰਮਾਂ ਨੂੰ ਸਾਹੀ ਲੋਕ ਕਹਿੰਦੇ ਚੰਗਾ ਸਾਰੇ ਧਰਮ ਚੰਗੇ ਨੇ ਚੰਗੀਆਂ ਗੱਲਾਂ ਨੇ ਪਰ ਫੇਰ ਕੀ ਉਸ ਸੈਟਰ ਨਹੀਂ ਹੈ ਉਹਨੂੰ ਤਾਂ ਦਾ ਜਿਹੜਾ ਗੁਰਮੁਖ ਹੈ ਜੀ ਉੱਥੇ ਜਿਹੜਾ ਆਪਣੀ ਅਕਲ ਨਾਲੇ ਬੋਲਦਾ ਉਹ ਬੁਲਾਇਆ ਨਹੀਂ ਬੋਲਦਾ ਬਸ ਅੰਤਰਾਤੂ ਜਿੰਨਾ ਜਣ ਨੂੰ ਗੁਰਤੀ ਪਤ ਨਹੀਂ ਮਿਲਦੀ ਆਤੈਂਤ ਸ਼ਬਦਾ ਸੁਭਾਅ ਹੈ ਗੁਰੂ ਅਰਬਿੰਦ ਦਾ ਗੁਰੂ ਗ੍ਰੰਥ ਦਾ ਕਵੀ ਰਜ਼ਾ ਪਰ ਜਿੰਨਾ ਜਦੋਂ ਉਹਨਾਂ ਨੂੰ ਉਹ ਵੀ ਕਿਤੇ ਨਾ ਕਿਤੇ ਫਸਲੇ ਹੋਏ ਤੇ ਸੰਸਾਰੀ ਮਤਾਂ ਵਿੱਚ ਪ੍ਰਭਾਵ ਲਭ ਸਾਰੇ ਜਿਹੜੇ ਟੋੜਦੇ ਫਿਰਦੇ ਨੇ ਉਹ ਨੂੰ ਨੇ ਸਾਰੇ ਜੋ ਕੁਰਬਾਨੀ ਹੈ ਕੁਰਬਾਨੀ ਦੇ ਉਪਦੇਸ਼ ਜਿਹੜਾ ਨੋਮ ਹੈ ਇਹਨੂੰ ਨੇ ਇਹ ਤਾਂ ਛੁਟਕਾਰਾ ਨਹੀਂ ਆ ਇਹ ਮੈਸੇਜ ਆਇਆ ਧਰੋ ਹਰ ਯੁਗ-ਯੁਗ ਭਗਤ ਉਪਾਇ ਕਿਉਂ ਕਿ ਟਾਈਮ ਟਾਈਮ ਸਿਰ ਭਗਤਾਂ ਆ ਕਰ ਲੈਂਦੇ ਹੋਰ ਇਹ ਰੂਪ ਬਣਾ ਦਿੰਦੇ ਆ ਹੁਣ ਗੁਰਵਾਦ ਦਾ ਹੋ ਰੇ ਰੂਪਾ ਜਿਹ ਸਾਡੇ ਕੋਲ ਹੈਗਾ ਹੈ तकरीबन 2.5 ਸੌ ਸਾਲ ਦਾ 2.5 ਸੌ ਸਾਲ ਦਾ ਜੀ ਬਿਲਕੁਲ ਇਹ ਗੁਰਵਾਦ ਦਾ ਰਹਿਿਆ ਹੀ ਨਹੀਂ ਹੈ ਜੇ ਕਹਿ ਦੀਏ ਅਰਬਾ ਦੇਵੀਓ ਸਾਰੇ ਸਾਰੇ ਬੋਧੇ ਮੈਂ ਛੱਡੜੂ ਵੀ ਤਿਆਰ ਦੀ ਪਰ ਤੇ ਵੀਆ ਉਹ ਸਰ ਉਹ ਗੱਲ ਨੂੰ ਛੱਡੜੂ ਵੀ ਰਿਆਦੀ ਇੱਟ ਨਹੀਂ ਹੁੰਦਾ ਇਸ ਕਰਕੇ ਇਹ ਜਿਹੜਾ ਗੁਰਬਾਣੀ ਅੰਦਰ ਆਤਮਾ ਦੀ ਆਵਾਜ਼ ਹੈ ਛਟਾਰਾ ਅੰਦਲੇ ਦਾ ਹੀ ਹੁਣ ਉਹ ਜਿਹੜਾ ਗੁਰਦੇਵ ਦਾ ਹੀ ਦੋ ਨਹੀਂ ਆਣੇ ਇਹ ਸੂਰਜ ਛੁੱਟ ਗਿਆ ਧੁੱਪ ਤਾਂ ਨਾਲੇ ਚਲੀ ਗਈ ਸੂਰਜ ਨੂੰ ਫੜ ਲਵੇ ਧੁੱਪੀ ਰਹੂਗੀ ਜੇ ਸੂਰਜੇ ਲੱਗਾ ਤਾਂ ਫਰਾਰ ਚਲੇਗੀ ਧੁੱਪ ਫੜੀ ਜਾਇ ਨਹੀਂ ਸਕਦੀ ਧੁੱਪ ਨੂੰ ਫੜ ਨਹੀਂ ਸਕਦੇ ਇਹਨੂੰ ਅਫਰਿਓ ਕਹਿੰਦੇ ਆ ਅਫਰਿਓ ਬਾਦੀ ਫੜਿਆ ਜਾ ਸਕਦਾ ਫੜਿਆ ਨਹੀਂ ਜਾ ਸਕਦਾ ਉਹਨੂੰ ਅਫਰਿਓ ਲਫਜ਼ ਉਹਦੇ ਵਾਸਤੇ ਆਇਆ ਹੋਇਆ ਇਹ ਗੱਲ ਹੈ ਜਿਹੜੀ ਸੇਵਾ ਸਤਗੁਰੂ ਦੀ ਹੋਈ ਹੈ ਗਿਆਨ ਅੰਦਰ ਜੀਵ ਨੂੰ ਬੁਲੇ ਹੈ ਨੇ ਪਰ ਗਿਆਨ ਅੰਦਰ ਇਦਰਾ ਤੋਂ ਬਿਨਾ ਸੋਣ ਲੈ ਵੀ ਤੂੰ ਸੁਣ ਕੇ ਗਿਆਨ ਹੋਣਾ ਕੱਲ ਸਾਡੇ ਕੋਲ ਨੇ ਸੁਣਨਾ ਵਿਚਾਰਨਾ ਕੀ ਸੁਣਨਾ ਕੀ ਨਹੀਂ ਸੁਣਨਾ ਜੇ ਸਰੋ ਮੇਰੇ ਸੱਚੇ ਸੁਣਨ ਨੂੰ ਪਿਠਾਏ ਸੱਚੇ ਕੱਲ ਨਹੀਂ ਗਿਆ ਸਵੜਾ ਨੂੰ ਗਿਆ ਅੰਦਰ ਨੂੰ ਥੋੜੇ ਸ਼ਕਤੀ ਹੋ ਗਿਆ ਉਹ ਕੰਨਾਂ ਨਾਲ ਬਾਹਰੋਂ ਦਾ ਲਿਬਰਟਡ ਯੇ ਗੱਲਾਂ ਸੁਣਦੀਆਂ ਨੇ ਆਪਾਂ ਅਸਲ ਵਿੱਚ ਸਤਰਾਤਵਲ ਦੀ ਬਾਤ ਸੁਣਦੀਆਂ ਹਾਂਜੀ ਮੰਦਾ ਮੂਲ ਨਾ ਕੀਚੀ ਜੇ ਮੰਦਾ ਮੂਲ ਨਾ ਕੀਚੀ ਦੇ ਲੰਮੀ ਨਦਰ ਉਹ ਨਾ ਕਰੋ ਚਾਹੇ ਉਹ ਬੁੱਧਾ ਹੈ ਚਾਹੇ ਨਹੀਂ ਹੈ ਬਾਤ ਦੇ ਵਿੱਚ ਪਰ ਤੁਸੀਂ ਪਹਿਲੀ ਸਟੇਜ ਦੇ ਵਿੱਚੋਂ ਕਰੋ ਲੋ ਜੇ ਬੁੱਧਾ ਬੀ ਜਿਹਨੂੰ ਤੁਸੀਂ ਆਪ ਬੋਲਦੇ ਹੋ ਕਰੋ ਨਾ ਛੱਡ ਦਿਓ ਪਰ ਬੁੱਦਾ ਵੀ ਤੁਸੀਂ ਕਹੀ ਜਾਂਦੇ ਹੋ ਕਰੀ ਵੀ ਜਾਂਦੇ ਛੱਡਦੇ ਵੀ ਹੈ ਨਹੀਂ ਹਾਂ ਇਹ ਵੀ ਬੁੱਧੇ ਆ ਵੀ ਜਿਹੜੀ ਪੈਸਾ ਹੈ ਇਹ ਸੰਖੀ ਹੈ ਮੁੱਤਕਰ ਹਟ ਕਹਿਣ ਤੇ ਪਹਿਲਾਂ ਕਹਿੰਦੇ ਰਹੇ ਨੇ 50 ਸਾਲ ਤੋਂ ਪਹਿਲਾਂ ਸੰਖੀ ਹੈ ਇਹ ਬਿਲਕੁਲ ਬੰਦ ਕਰ ਦਿੱਤਾ ਸਾਰੇ ਖਾਦੇ ਨੇ ਨਾ ਜੀ ਐਂਦੇ ਝੱਡ ਕੇ ਖਾਈ ਵੀ ਜਾਂਦੇ ਹੋ ਕਹੀ ਵੀ ਜਾਂਦੇ ਦੇ ਜੇ ਬਰਾਬਰ ਦੇ ਖਾਣੇ ਖਾਦੇ ਹਾਂ ਇਹਦੇ ਕੰਮ ਨੂੰ ਤੁਸੀਂ ਮੰਨਦਾ ਕਹਿੰਦਾ ਕਰਦੇ ਕਿਉਂ ਲੰਬੀ ਨਗਾ ਕੇ ਦੇਖੋ ਕਿ ਸੰਸਾਰ ਦੇ ਥੋੜੇ ਜਿਹਾ ਜੀਵਨ ਵਾਸਤੇ ਤੁਸੀ ਕੀ ਕੀ ਪਾਪ ਅਪਰਾਧ ਕਰ ਰਹੇ ਹੋ ਕੀ ਕੀ ਤੁਸੀਂ ਸੱਚ ਦੇ ਨਾਲ ਤੇ ਝੂਠ ਬੋਲ ਰਹੇ ਹੋ ਕੀ ਕੀ ਲੋਕਾਂ ਨਾਲ ਧੜਾ ਕਰ ਰਹੇ ਹੋ ਸੱਚੇ ਲੋਕ ਤੇ ਜਿਹੜੇ ਧਰਮ ਕਾਜ਼ੀ ਦੀ ਗੱਲ ਹੈ ਦੋਹਾਂ ਦੀ ਨਹੀਂ ਗੱਲ ਹੈ ਤੁਹਾਡਾ ਗੱਲ ਧਰਮ ਦੀ ਚੱਲ ਰਹੀ ਹੈ ਧਰਮ ਕਾਜ਼ੀ ਨਾਲ ਚੱਲ ਰਹੀ ਹੈ। ਅਪਰਾਧੀ ਦਾ ਤੁਹਾਨੂੰ ਬੰਦਾ ਹੀ ਨਹੀਂ ਹੈ ਜਿਹੜਾ ਬੰਦਾ ਕੋਲ ਗਏ ਨੇ। ਬੁੱਤਰਾ ਜੀ ਗਏ ਨੇ ਜਿੱਤੇ ਸਿੱਧੂ ਸੀਗੇ ਧਰਮ ਦੇ ਸਿੱਧਾ ਕੋਲ ਉੱਥੇ ਗਏ ਨੇ। ਮੁਸਲਮਾਨੋਂ ਦੇ ਵੀ ਜਿੱਤੇ ਸੀ ਮਤਲਬ ਹੈ ਆਦਮੀ ਸੀ ਉਪਦੇਸ਼ ਕਰਨ ਵਾਲੇ ਉਹਨਾਂ ਕੋਲ ਗਏ ਬੁੱਦਾ ਮੌਲਨਾ ਕੀਜੀ ਐਸਾ ਕਾਬੂ ਬਤ ਕਰੋ ਜਿਹਨੂੰ ਤੁਸੀਂ ਬੁੱਦਾ ਬੁੱਦਾ ਚਲੋ ਲੰਬੀ ਨਿਗਾਹ ਮਾਰ ਕੇ ਦੇਖੋ ਭਈ ਇਹ ਤੁਸੀਂ ਇੱਥੇ ਜੇ ਪੈਸੇ ਆਪ ਡੱਬ ਕੇ ਵੀ ਇਕੱਠੇ ਵੀ ਕਰ ਲਾਂਗੇ ਜੀ ਤਾਂ ਇੱਥੇ ਡੱਬ ਕੇ ਚਲੇ ਜਾਵੋਗੇ ਇੱਥੇ ਰਹਿ ਜਾਣਾ ਜੀਵਣਾ ਬੜਾ ਖਰਾਬ ਗੱਲ ਨੂੰ ਤੁਸੀਂ ਤਾਂ ਧਰਤੀ ਤਨ ਤਾਂ ਸੁਵੇਟੇ ਦਾ ਸ਼ਰੀਰ ਰਹਿਣਾ ਨੋ ਪਰਸਨ ਨਾਲ ਜਾਂਦੇ ਸਿਰ ਕਾਲੇ ਵਾਸਤੇ ਤੁਸੀਂ ਕਰਦੇ ਹੋ ਇਹ ਲੰਬੀ ਸੋਚ ਹੈ ਤੇ ਲੰਬੀ ਨਦਰ ਨਹੀਂ ਹੱਲੇ ਵਧੀ ਹੈ ਹਾਂ ਨਵੀਂ ਨਗਾ ਮਾਰ ਕੇ ਦੇਖੋ ਜੀ ਜੀ ਲੰਬੀ ਨਗਾ ਮਾਰੋਗੇ ਕੋਈ ਬੁਰਾ ਕੋਈ ਕਬਲ ਕਰਦਾ ਹੀ ਨਹੀਂ ਹੈ ਨਾ ਹਾਰੀ ਹੈ ਤੇ ਵੇਹਾ ਪਾਸਾ ਢਾਗੀ ਹੈ ਅੰਦਰ ਸਾਹਿਬ ਸਤਿਰਾਸੋ ਦੀਵਾ ਜੀ ਇਹਦੇ ਮੂਰੇ ਸਿਰੋਂ ਦੂਣੀ ਵੱਖਾ ਜੀ ਅਸੀਂ ਉਹਦੀ ਗੱਲ ਨਹੀਂ ਨਾ ਬੰਦੀ ਬੱਦੀ ਬੱਦ ਰਹੇ ਜੀ ਆਖਰ ਤੁਸੀਂ ਹਾਰ ਸਾਡੀ ਗਲਤੀ ਆ ਅਸੀਂ ਤੇਰੀ ਗਲਤੀ ਬੱਦੀ ਆਪਣੀ ਗਲਤੀ ਕੱਲ ਨੂੰ ਮੰਨਾਂਗੇ ਵੀ ਗਲਤੀ ਸਾਡੀ ਆ ਤੁਹਾਡੀ ਦੀ ਗਲਤੀ ਉਹ ਕਹਿੰਦਾ ਤੈਨੂੰ ਤਾਂ ਮੈਂ ਤਾਂ ਕਹਿੰਦਾ ਰਿਆਂ ਨਾ ਕਰਾ ਰਾ ਕਰ ਹੁਣ ਦੱਸ ਬਈ ਤੇ ਹਾਰ ਗਿਆ ਨਾ ਇਹ ਗਲਤੀ ਆਪਣੀ ਬੁਲਦੀ ਹੋਊਗੀ ਜੇ ਸਾਹਿਬ ਨਾਲ ਨਾ ਹਾਰੀ ਆ ਤੇ ਵੇਹਾਂ ਪਾਸਾ ਧਾਨੀ ਗਿਆ ਉਹ ਜਿਹੜਾ ਪਾਸਾ ਵੱਲੋਂ ਬੁੱਧ ਉਸ ਰਸਤੇ ਚੱਲੀਏ ਉਸ ਤਰਾ ਚੱਲੀਏ ਉਸ ਉਸੇ ਨੂੰ ਮੰਨੂ ਬਨਾਈਏ ਮੰਨੂ ਢਾਲੀਏ ਉਲਟੇ ਪਾਸੇ ਨੂੰ ਜਾ ਰਿਹਾ ਇਹਨੂੰ ਢਾਲ ਕੇ ਦੀਵੇ ਪਾਸੇ ਨੂੰ ਲੈ ਆਈਏ ਜੇ ਵਰ برف ਦਾ ਓੜਾ ਬਣਿਆ ਹੋਇਆ ਹੈ ਤਾਂ ਖੜਾ ਹੈ ਪੱਥਰ ਵਾਂਗੂ ਜਿਵੇਂ ਜਿਹਾ ਪੱਥਰ ਹੋ ਗਿਆ ਓੜਾ ਇਹ ਢਲ ਕੇ ਢਲ ਜਵੇ ਤਾਂ ਢਲ ਕੇ ਦੀਵੇ ਚਲਾ ਜਾਂਦਾ ਪਾਣੀ ਗੁਣ ਕੇ ਆਪੇ ਹੀ ਦੇਈਦਾ ਦੁਨੀਆ ਦੀਆਂ ਬੜਾਈਆਂ ਉੱਚੇ ਜਾਂਦਾ ਖੜਾ ਰਾਜ ਕਰੇਗਾ ਖਾਲਸਾ ਵੀ ਇਸੇ ਦੇ ਵਿੱਚ ਪਿਆ ਹੋਇਆ ਦੁਨੀਆ ਦੀ ਬੜਾਈ ਦੀ ਭੁੱਖ ਹੈ ਕਾਇਆ ਨਹੀਂ ਤੇ ਵੇਲਾ ਪਾਸਾ ਤਾਲੀ ਜਰਾ ਰਾਜ ਕਰਨ ਨਾਲ ਬਗਲਵਾ ਲੋਕਾਂ ਨੂੰ ਆਪਣੇ ਹੁਕਮ 'ਤੇ ਚਲਾਉਣਾ ਜਿਵੇਂ ਅਸੀਂ ਆਪ ਦੇ ਹੁਕਮ 'ਤੇ ਸਾਰਿਆਂ ਨੂੰ ਕਹਿਣਾ ਪਰਮੇਸ਼ਰ ਦੇ ਹੁਕਮ 'ਤੇ ਚੱਲੋ ਰਾਜ ਦਾ ਮਤਲਬ ਤਾਂ ਆਪਣੇ ਹੁਕਮ 'ਤੇ ਚਲਾਉਣਾ ਸ਼ਰੀਕ ਖੁਦਾ ਵੱਲ ਔਰ ਖਾਲਸੇ ਦਾ ਰਾਜ ਤਾਂ ਪਰਮੇਸ਼ਰ ਦਾ ਰਾਜ ਹੈ ਰਾਜ ਸਿੱਖਾਂ ਦਾ ਹੋ ਸਕਦਾ ਸਿੱਖਾਂ ਦਾ ਰਾਜ ਜਣੀਸ ਉਹਦਾ ਬਿਲਕੁਲ ਖਾਲਸੇ ਸਿੱਖ ਰਾਜ ਕਹਿੰਦੀ ਹੈ ਜਿਹੜਾ ਖਾਲਸੇ ਦਾ ਰਾਜ ਕਿੱਥੋਂ ਆ ਗਿਆ ਸ਼ਰਾਰਤੀ ਲੋਕ ਨੇ ਬਹੁਤ ਜ਼ਿਆਦਾ ਸ਼ਰਾਰਤੀ ਨਾ ਥੋੜੇ ਨਹੀਂ ਹਨ ਜੀ ਇਹ ਦੱਸਦੇ ਕਿ ਖਰਾਜ ਸਿਗਾ ਖਾਲਸੇ ਦਾ ਰਾਜ ਨਹੀਂ ਸੀਗਾ ਇਹਦੇ ਵਿੱਚ ਕੀ ਫਰਕ ਹੋ ਗਿਆ ਜੀ ਖਾਲਸੇ ਖਾਲਸੇ ਦਾ ਰਾਜ ਖਾਲਸੇ ਦੀ ਜਿਹੜੀ ਫੌਜ ਆ ਖਾਲਸਾ ਫੌਜ ਆ ਉਹ ਕਾਲੀ ਗੁਰਦਵਾਰੇ ਤੋਂ ਨਹੀਂ ਦੀ ਫੌਜ ਆ ਰਣੀ ਇਹ ਕਿਉਂ ਆਇਆ ਇਹਦੇ ਬਲੂਏ ਦੀ ਆ ਦੀ ਡੋਰੀਆਂ ਦੀ ਕੰਮ ਚੱਲੇ ਆ ਕਾਹਲੇ ਜੀਸੂ ਕਹਿੰਦਾ ਜੀਸੂ ਦੇ ਪਿਓ ਨੇ ਦਾਦਿਆਂ ਨੇ ਰਾਜ ਬਿਸਣ ਲਿਆ ਨੇ ਖਾਲਸੇ ਨੇ ਆਪਣਾ ਬਾਣਾ ਲਾ ਲਿਆ ਤੇ ਬਾਣਾ ਬਾਣਾ ਹੋ ਗੁਰਾ ਬਾਣਾ ਹੋਰ ਬਾਣਾ ਪਾਉਣੇ ਨਹੀਂ ਕੱਤਾਲ ਫੇਰ